ਕਛ ਨਾ ਕਹੇ ਜਮਕਾਲ ਗੁਰਬਾਣੀ ਦਾ ਫਰਮਾਨ ਹੈ ਹਰ ਹਰ ਨਾਮ ਜਪੰਤਿਆਂ ਕਛ ਨਾ ਕਹੇ ਜਮਕਾਲ ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਕੋਪਾਲ ਭਾਵ ਪਰਮੇਸ਼ਰ ਦਾ ਨਾਮ ਜਪਣ ਵਾਲਿਆਂ ਨੂੰ ਮੌਤ ਦਾ ਡਰ ਖਤਮ ਹੋ ਜਾਂਦਾ ਹੈ ਜਮ ਕਛ ਨਹੀਂ ਕਹਿੰਦਾ ਦੱਸਦੇ ਹਨ ਸ੍ਰੀ ਗੁਰੂ ਜੀ ਕਿ ਮਨ ਤੇ ਤਨ ਸੁਖੀ ਹੋ ਜਾਂਦਾ ਹੈ ਅਤੇ ਅੰਤ ਨੂੰ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ ਜਿਥੇ ਸੰਸਾਰੀ ਬੰਦਾ ਮੌਤਾ ਨਾਉ ਸੁਣਨ ਨੂੰ ਤਿਆਰ ਨਹੀਂ ਮੌਤਾ ਨਾਉ ਸੁਣ ਕੇ ਕੰਮਣ ਲੱਗ ਜਾਂਦਾ ਹੈ ਮੌਤ ਸਾਹਮਣੇ ਦੇਖ ਕੇ ਸੁਧ-ਬੁੱਧ ਗਵਾ ਲੈਂਦਾ ਹੈ ਉਥੇ ਪਰਮੇਸ਼ਰ ਦੇ ਪਿਆਰੇ ਵਾਲੇ ਮੌਤ ਨੂੰ ਸਾਹਮਣੇ ਆਈ ਦੇਖ ਕੇ ਨਰਪੈ ਹੋ ਕੇ ਵਿਚਰਦੇ ਹਨ ਬਲਕਿ ਕਬੀਰ ਸਾਹਿਬ ਤਾਖਦੇ ਹਨ ਕਬੀਰ ਜਿਸ ਮਰਨੇ ਤੇ ਡ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਸਿੱਖ ਇਤਿਹਾਸ ਤੇ ਝਾਤ ਪਾਈਏ ਤਾਂ ਪਤਾ ਚੱਲਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਜੋਤੀ ਜੋਤ ਸਮਾਉਣ ਦਾ ਪਹਿਲਾਂ ਪਤਾ ਸੀ ਇਸ ਲਈ ਆਪਣੇ ਹੁੰਦੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਬਖਸ਼ ਕੇ ਕੁਝ ਦਿਨ ਸੰਸਾਰ ਵਿਚਰ ਕੇ ਬਗੈਰ ਕਿਸੇ ਬਿਮਾਰੀ ਤੋਂ ਚਾਦਰ ਲੈ ਕੇ ਪੈ ਗਏ ਅਤੇ ਸਰੀਰ ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਕੀਤਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਤ ਸਮੇਂ ਜੋ ਵਾਪਰਿਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ RAM KALI SAD ਬਾਣੀ ਵਿੱਚ ਬਾਬਾ ਸੁੰਦਰ ਜੀ ਦੀ ਰਚਨਾ ਵਿੱਚ ਦਰਜ ਹੈ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਕਿਸ ਤਰ੍ਹਾਂ ਗੁਰੂ ਸਾਹਿਬ ਨੂੰ ਆਪਣੇ ਅੰਤ ਸਮੇ ਦਾ ਪਤਾ ਲੱਗ ਗਿਆ ਸੰਗਤ ਵਿੱਚ ਬੈਠਿਆ ਨੇ ਆਪਣੇ ਪਰਿਵਾਰ ਦੇ ਜੀ ਸਾਧ ਲਈ ਤੇ ਸਾਰੀ ਸੰਗਤ ਦੇ ਸਾਹਮਣੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰੂ ਗੱਦੀ ਸੌਂਪ ਕੇ ਬਗੈਰ ਕਿਸੇ ਬਿਮਾਰੀ ਤੋਂ ਸਭ ਤੋਂ ਸਭ ਦੇ ਸਾਹਮਣੇ ਸਰੀਰ ਦਾ ਤਿਆਗ ਕਰ ਗਏ ਪੰਚਮ ਕਾਰਨ ਸਿਰਕ रोग ਹੋਇਆ ਉਸ ਦਾ ਸਭ ਨੂੰ ਪਤਾ ਹੈ ਪਰ ਕਾਮਰੇਡੀ ਵਿਗਿਆਨਿਕ ਸੋਚ ਉਸ ਨੂੰ ਮੰਨਣ ਨੂੰ ਤਿਆਰ ਨਹੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਪਣੀ ਜੀਵਨ ਰੋਪੀ ਖੇਡ ਖਤਮ ਕਰਨ ਤੋਂ ਪਹਿਲਾਂ ਸਭ ਕੁਝ ਜਾਣਦੇ ਹੋਏ ਸਭ ਹਰਿ ਹਰਿ ਦਸਮ ਪਿਤਾ ਨੂੰ ਦੇ ਦਿੱਤੀਆਂ ਅਤੇ ਦਸਮ ਗੁਰੂ ਅੰਸ ਵਿੱਚ ਗੁਰੂ ਅੰਸ ਵਿੱਚੋਂ ਬਾਬਾ ਅਟਲ ਰਾਏ ਜੀ ਬਗੈਰ ਕਿਸੇ ਬਿਮਾਰੀ ਤੋਂ ਪਿਤਾ ਗੁਰੂ ਦਾ ਹੁਕਮ ਮੰਨ ਕੇ ਕਪੜਾ ਲੈ ਕੇ ਪਹਿ ਗਏ ਤੇ ਸ੍ਰੀ ਛੱਡ ਦਿੱਤਾ। ਇਸੇ ਤਰ੍ਹਾਂ ਬਾਬਾ ਗੁਰਦੇਤਾ ਜੀ ਨੇ ਕਰਕੇ ਦਿਖਾ ਦਿੱਤਾ ਕਿ ਕਿਸੇ ਵਿਗਿਆਨੀ ਨੇ ਅਜੇ ਤੱਕ ਇਸ ਤਰ੍ਹਾਂ ਕੀਤਾ ਹੈ ਜਾਂ ਕੋਈ ਵਿਗਿਆਨੀ ਹੁਣ ਕਰਕੇ ਦਿਖਾ ਸਕਦਾ ਹੈ। ਇਸ ਦਾ ਉੱਤਰ ਸਿੱਖ ਧਰਮ ਦੇ ਵਿਗਿਆਨਿਕ ਧਰਮ ਕਹਿਣ ਵਾਲੇ ਪੰਡਤ ਹੀ ਦੇ ਸਕਦੇ ਹਨ। ਦੂਸਰੇ ਅੱਜ ਕੱਲ ਦੇ ਪਖੰਡੀ ਗੁਰੂ ਅਤੇ ਬਾਦੂ ਦੀਆਂ ਖੰਭਾ ਵਾਂਗ ਉੱਗੇ ਖੋਤੀ ਪੂਰਨ ਬ੍ਰਹਮ ਗਿਆਨੀਆਂ ਲਈ ਵੀ ਇਹ ਇੱਕ ਚੁਣੌਤੀ ਹੈ ਸਭ ਤੋਂ ਵੱਡੀ ਦੁਕਾਨ ਦੇ ਮਾਲਕ ਵਿਆਸਾ ਵਾਲਿਆਂ ਨੇ ਵੀ ਆਪਣੀ ਵਸੀਅਤ ਬੈਂਕ ਲਾਕਰ ਵਿੱਚ ਰੱਖੀ ਹੋਈ ਸੀ ਉਸ ਮਰਨ ਪਿੱਛੋਂ ਹਣ ਵਾਲੇ ਗੁਰੂ ਨੂੰ ਵਿਦੇਸ਼ ਵਿੱਚੋਂ ਬੁਲਾਇਆ ਗਿਆ ਅਤੇ ਡੇਰੇ ਦਾ ਮਾਲਕ ਬਣਾ ਦਿੱਤਾ ਗਿਆ ਦਸ਼ਮੀ ਇਸ ਦੇ 7 ਸਾਲ ਅਤੇ 9 ਸਾਲ ਦੇ ਦਲਾਰਿਆਂ ਨੇ ਜਿਸ ਤਰ੍ਹਾਂ ਹਾਸ ਹਾਸ ਮੌਤ ਨੂੰ ਗਲ ਵਕੜੀ ਪਾਈ ਸਾਰੇ ਸੰਸਾਰ ਦੇ ਇਤਿਹਾਸ ਵਿੱਚ ਨਵੇਕਲੀ ਮਿਸਾਲ ਹੈ ਕਿ ਇਹ ਜ਼ਾਹਰਾ ਕਰਾਮਤ ਨਹੀਂ ਜਿਸ ਨੂੰ ਵਿਗਿਆਨਕ ਸੋਚਵਾਲੇ ਮੰਨਣ ਨੂੰ ਤਿਆਰ ਨਹੀਂ ਕਿ ਕਾਮਰੇਡ ਇਤਿਹਾਸ ਵਿੱਚ ਕੋਈ ਐਸੀ ਮਿਸਾਲ ਮਿਲਦੀ ਹੈ ਜਾਂ ਕਿ ਇਹ ਕਾਮਰੇਡ ਹੋਣ ਕੁਝ ਜਿਹੀ ਮਿਸਾਲ ਪੇਸ਼ ਕਰ ਸਕਦੇ ਹਨ ਇਸ ਪਿੱਛੋਂ 18ਵੀਂ ਸਦੀ ਦਾ ਸਾਰਾ ਸਿੱਖ ਇਤਿਹਾਸ ਅਜਿਹੀਆਂ ਮਿਸਲਾਂ ਨਾਲ ਭਰਿਆ ਪਿਆ ਹੈ ਕਿ ਕਿਸ ਤਰ੍ਹਾਂ ਹਸਸ ਕੇ ਚਰਖੜੀਆਂ ਦੇ ਚੜੇ ਬੰਦ-ਬੰਦ ਕਟਵਾਏ ਖੋਪਰੀਆਂ ਲਹਾਈਆਂ ਬਾਬਾ ਦੀਪ ਸਿੰਘ ਜੀ ਵਰਗੇ ਸੀ ਸਟਲੀ ਤੇ ਰੱਖ ਕੇ ਲੜੇ ਜਿਸ ਨੂੰ ਵਿਗਿਆਨਕ ਸੋਚ ਮੰਨਣ ਨੂੰ ਤਿਆਰ ਨਹੀਂ ਅਤੇ ਕਾਮਰੇਡੀ ਕਲਮਾ ਇਸ ਨੂ ਹੋਰ ਰੰਗਤ ਵਿੱਚ ਪੇਸ਼ ਕਰਕੇ ਸਿੱਖ ਇਤਿਹਾਸ ਨਾਲ ਖਲਵਾੜ ਕਰ ਰਹੀਆਂ ਹਨ ਭਾਈ ਤਾਰੂ ਸਿੰਘ ਜੀ ਨੂੰ ਜਦ ਲਾਹੌਰ ਤੋਂ ਸਪਾਈ ਫੜਨ ਆਏ ਪਿੰਡ ਵਾਲਿਆਂ ਪਹਿਲਾਂ ਰਿਸ਼ਵਤ ਦੇ ਕੇ ਸਪਾਈ ਮੂੜਨੇ ਚਾਹੇ ਪਰ ਉਹ ਨਾ ਫਿਰ ਪਿੰਡ ਵਾਲਿਆਂ ਨੇ ਜੋ ਕਹੋ ਤਾਂ ਇਹਨਾਂ ਨੂੰ ਮਾਰ ਕੇ ਤਿੰਨ ਛੜਾ ਲਈਏ ਅੱਗੋਂ ਜੋ ਨਾ ਉੱਤਰ ਦਿੱਤਾ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਕਰਤਾ ਪੰਗੂ ਸਿੰਘ ਜੀ ਨੇ ਇੰਜ ਲਿਖਿਆ ਹੈ ਅਸੀਂ ਨਾ ਮਰਨੋਂ ਨੱਠਣ ਵਾਰੇ ਅਸੀਂ ਜੋ ਮਰਹੈ ਮੁਗਲ ਦੁਆਰੇ ਸਿੱਖਨ ਕਾਰਨ ਗੁਰ ਸਿਰ ਲਾਏ ਪੋਤ ਪੋਤੇ ਪੁਨ ਆਪ ਕੋ ਹਾਈ ਪੰਥ ਬਧਾਵਨ ਖਾਤਰ ਤਾਈ ਜਿਸ ਆਪਣੀ ਗਵਾਈ ਉਸ ਪੰਥੀ ਹਮੇ ਸਦਾਇ ਹਮਰਨੇ ਤੇ ਕਿਮ ਨ ਠਜਾਈ ਸਿਖਨ ਕਾਰਨ ਸਤਗੁਰੂ ਦੀਨੇ ਸੀਸ ਲਗਾਏ ਹਮ ਸੋ ਸਿਖ ਹਮ ਉਸ ਗੁਰੂ ਕੇ ਕਿਮ ਰਾਖੇ ਸੀਸ ਬਚਾਏ ਜਿਸ ਮਨ ਮੇ ਪੈ ਗੁਰੂ ਤਿਸ ਪੈ ਜਮਕਾ ਨਹੀਂ ਜਿਸ ਕੇ ਹੱਥ ਮਸਾਲ ਹੈ ਕਿ ਕਰਗ ਅੰਧੇਰੋ ਤਾਹੀਂ ਕੀ ਇੰਦਰ ਸਿੰਘ ਕਗਾਤੇ ਮਿਸ਼ਨ ਨੀਕਾਲ ਜਵਾਲਿਆਂ ਦਾ ਵਿਗਿਆਨ ਧਰਮ ਜਹੀ ਸਪਿਰਟ ਪੈਦਾ ਕਰ ਸਕਦਾ ਹੈ ਇਸੇ ਲਈ ਸਾਕਾ ਨੀਲਾ ਤਾਰਾ ਅਤੇ ਉਸ ਪਿੱਛੋਂ ਸਰਕਾਰੀ ਮਸ਼ੀਨਰੀ ਅਤੇ ਜਜਾਰੂ ਖਾਲਸੇ ਦੇ ਕੋਲ ਵਿੱਚ ਵੀ ਚੱਡੇ ਪੜਵਾਏ ਕੋਟੜੇ ਲਵਾਏ ਲਵਾਉਣ ਵਾਲੇ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ੀਧੀਆਂ ਪਾਉਣ ਵਾਲੇ ਸਭ ਕੱਗੇ ਦੀ ਸੋਚ ਅਨੁਸਾਰ ਅੰਧਵਿਸ਼ਵਾਸੀ ਬ੍ਰਾਹਮਣਵਾਦੀ ਤੇ ਪਖੰਡੀ ਸਿੱਖ ਦਮ ਦੀ ਰਕਸਾਲ ਤੇ ਜਥੇ ਦੇ ਸਿੰਘ ਕੁਝ ਸਿੱਖ ਸਿਕਸ ਰਨ ਫਾਊਂਡੇਸ਼ਨ ਕਾਰਸੇਵ ਵਾਲੇ ਬਾਬਿਆਂ ਦੇ ਵੀ ਸਨ ਜਿਨ੍ਹਾਂ ਵਿੱਚ ਸਿੱਖ ਧਰਮ ਨੂੰ ਵਿਗਿਆਨਕ ਮੰਨਣ ਵਾਲਾ ਮਿਸ਼ਨਰੀ ਕਾਲਜਾਂ ਦਾ ਪੈਦਾ ਹੋਇਆ ਇਕ ਵੀ ਨਹੀਂ ਸੀ ਇਹ ਦਮਨੀ ਟਕਸਾਲ ਦਾ ਵਿਦਿਆਰਥੀ ਸੰ ਜਰਨੈਲ ਸਿੰਘ ਹੀ ਸੀ ਜਿਸ ਨੇ ਭਾਰਤ ਸਰਕਾਰ ਦੀ ਆਧੁਨਿਕ ਹਥਿਆਰਾਂ ਨਾਲ ਲੈਸ ਤੋਪਾਂ ਟੈਂਕਾਂ ਵਾਲੀ 72000 ਫੌਜ ਅੱਗੇ ਕੋਡੇ ਨਹੀਂ ਟੇਕੇ ਇੰਦਰ ਸਿੰਘ ਘਾਗਾ ਦਾ ਬਣਾਇਆ ਸਿੱਖੀ ਦੀ ਆਕਾਸ਼ ਦਾ ਗੰਗਾ ਦਾ ਤਰੂ ਤਾਰਾ ਗੁਰਬਖਸ਼ ਸਿੰਘ ਕਾਲਾ ਫਗਾਨਾ ਜਿਸ ਨੇ ਸਾਰੇ ਸਿੱਖ ਜਗਤ ਨੂੰ ਆਪਣੀਆਂ ਕਿਤਾਬਾਂ ਵਿੱਚ ਬ੍ਰਾਹਮਣਵਾਦੀ ਤੇ ਅੰਧਵਿਸ਼ਵਾਸੀ ਲਾਨਿਆ ਹੈ ਮੌਕਾ ਪੈਣ ਤੇ ਟਪੂਸੀ ਮਾਰ ਕੇ ਕੈਨੇਡਾ ਜਾ ਵੜਿਆ 7 ਜੂਨ 1984 ਨੂੰ ਜਦ ਬੀਰ ਹਰਮੰਦਰ ਸਾਹਿਬ ਅੰਦਰ ਪੂਰੀ ਤਰ੍ਹਾਂ ਭਾਰਤੀ ਫੌਜ ਕਾਬਜ਼ ਹੋ ਚੁੱਕੀ ਸੀ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਕਰਨ ਵਾਲਾ ਸਿੰਘ ਵੀ ਕੰਡ ਕਿੰਨੀ ਸੀ ਜੋ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਪੱਟੀ ਦਾ ਸੀ ਕੀਰਤਨ ਕਰਦੇ ਅਹੀ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਅਤੇ ਦਰਬਾਰ ਸਾਹਿਬ ਦੀ ਵਿਸ਼ੀ ਯਾਦ ਰਜਿਸਤੇ ਬੈਠਾ ਕੀਰਤਨ ਕਰ ਰਿਹਾ ਸੀ ਉਸ ਦਾ ਕਫਨ ਬਣੀ ਪਾਠ ਕਾ ਪਿੰਦਾਜਾ ਲਾਉਣ ਕੇ ਜਦ ਚਾਰੇ ਪਾਸੇ ਗੋਲੀਆਂ ਰਾਕਟ ਤੇ ਬੰਬ ਚੱਲ ਰਹੇ ਸਨ ਉਹ ਕਿਹਦਾ ਸਮਾਂ ਹੋਵੇਗਾ ਐਸੇ ਸਮੇ ਵੀ ਇਹ ਸੰਗ ਇਕੱਲਾ ਹੀ ਕੀਰਤਨ ਕਰ ਰਿਹਾ ਸੀ ਤਾਂ ਇਸ ਦੀ ਆਤਮਿਕ ਅਵਸਥਾ ਕੈਸੀ ਹੋਵੇਗੀ ਇਹ ਪਲੀਪਾਂਤ ਜਾਣੀ ਜਾ ਸਕਦੀ ਹੈ ਜਿਹੀ ਅਵਸਥਾ ਸਾਹਮਣੇ ਇਹ ਵਿਗਿਆਨਕ ਸੋਚ ਵਾਲੇ ਤਰਕਵਾਦੀ ਕੀ ਹੱਥ ਰੱਖਦੇ ਹਨ ਦੂਸਰੇ ਪਾਸੇ ਅੱਸੀ ਹੁਣ ਵਿਗਿਆਨਕ ਸੋਚ ਵਾਲੇ ਨੇ ਉਦਾਹਰਣ ਪੇਸ਼ ਕਰਨ ਲੱਗੇ ਹਾਂ ਪਿੱਛੇ ਜੇਤ ਪੁਨੀਆਰਾ ਵਾਲੇ ਪਖੰਡੀ ਗੁਰੂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਤਾਂ ਸਾਰੇ ਸਿੱਖ ਜਗਤ ਵਿੱਚ ਰੋਸ ਲਹਿਰ ਫੈਲੀ ਖਾਲਸਾ ਪੰਚਾਇਤ ਹੋਰ ਜਥੇਬੰਦੀਆਂ ਨਾਲ ਰਲ ਕੇ ਪਟਿਆਲਾ ਦੇ ਮਿਸ਼ਨਰੀ ਕਾਲਜ ਵਾਲਿਆਂ ਨੇ ਵੀ ਰੋਸ ਮੁਜ਼ਾਹਰੇ ਵਿੱਚ ਹਿੱਸਾ ਲਿਆ ਦੋ ਕੁ ਬੱਸ ਸਟੈਂਡ ਦੇ ਕੋਲ ਟ੍ਰੈਫਿਕ ਵੀ ਜਾਮ ਕੀਤੀ ਸਰਕਾਰੀ ਮਸ਼ੀਨਰੀ ਹਰਕਤ ਵਿੱਚ ਆਈ ਸੀਏਡੀ ਮੈਕਬੇ ਲਈ ਅਫਸਰ ਤਫਤੀਸ਼ ਕਰਨ ਲੱਗ ਪਏ ਕਿ ਕੌਣ-ਕੌਣ ਇਸ ਦੇ ਮੋਢੀ ਭਾਈਵਾਲ ਹਨ ਇੱਕ ਸੀਏਡੀ ਇਨਸਪੈਕਟਰ ਨੇ 2 3 ਹੋਰ ਬੰਦਿਆਂ ਨਾਲ ਬੁੱਢਾਦਲ ਪਬਲਿਕ ਸਕੂਲ ਕੋਲ ਜਿੱਥੇ ਮੈਕੈਨੀਕਲ ਜਵਾਨਾ ਦਾ ਦਫ਼ਤਰ ਸੀ ਉੱਥੇ ਪੜਤਾਲ ਕਰਨ ਆ ਗਿਆ ਕੁਦਰਤੀ ਦਾਸ ਵੀ ਕਿਸੇ ਕੰਮ ਉੱਥੇ ਗਿਆ ਹੋਇਆ ਸੀ ਇਨਸਪੈਕਟਰ ਦੀ ਪੁੱਛ ਪੜਤਾਲ ਤੇ ਸਾਰੇ ਕੰਮਣ ਲੱਗੇ ਤੇ ਸਾਫ਼ ਹੀ ਮੁਕਰ ਗਏ ਤੇ ਕਹਿਣ ਲੱਗ ਪਏ ਕਿ ਸਾਡਾ ਖਾਸਾ ਪੰਚਾਇਤ ਉਹਨਾਂ ਦੀ ਗਤੀਵਧੀਆਂ ਨਾਲ ਕੋਈ ਲੈਣ ਦੇਣ ਨਹੀਂ ਸਾਡਾ ਕੰਮ ਤਾਂ ਧਰਮ ਦਾ ਪ੍ਰਚਾਰ ਕਰਨਾ ਹੈ ਤੇ ਸਿੱਖ ਧਰਮ ਦਾ ਲਿਟਰੇਚਰ ਸਸਤੇ ਮੁੱਲ ਤੇ ਦਿੰਦੇ ਹਾਂ ਹੁਣ ਸੀ ਪਾਠਕਾਂ ਦੀ ਗਿਆਤ ਲਈ ਕੁਝ ਉਹਨਾਂ ਗੁਰੂ ਕੇ ਸਿੱਖਾਂ ਦੀ ਉਦਾਹਰਣਾਂ ਦਿੰਦੇ ਹਾਂ ਜਿਨ੍ਹਾਂ ਨੇ ਗੁਰੂ ਆਸ਼ੀ ਅਨਸਾਰ ਜੀਵਨ ਬਤੀਤ ਕਰਕੇ ਇੱਕ ਆਮ ਸੰਸਾਰੀ ਬੰਦੇ ਹੁੰਦੇ ਹੋਏ ਵੀ ਜੀਵਨ ਸਫਲਾ ਕਰ ਗਏ ਪਟਿਆਲਾ ਦੇ 22 ਨੰਬਰ ਫਾਟਕ ਦੇ ਉੱਪਰ ਪੁਲ ਦੇ ਅਖੀਰ ਵਿੱਚ ਜਿੱਥੇ ਹੁਣ ਰੈਸ਼ੀ ਮਕਾਨਾਂ ਵਾਲਾ ਸ਼ਾਪਿੰਗ ਕੰਪਲੈਕਸ ਹੈ ਇਹ ਪਹਿਲਾਂ ਸਰਦਾਰ ਬਚਿੱਤਰ ਸਿੰਘ ਗਰੇਵਾਲ ਦੀ ਰਹਿਸ਼ੀ ਕੋਠੀ ਸੀ ਇਹ ਲੋ ਜ਼ਿਲ੍ਹੇ ਦੇ ਪਿੰਡ ਮਹਿਮਾ ਸਿੰਘ ਦੇ ਵਸਨੀਕ ਸਨ ਅਤੇ ਪਟਿਆਲੇ ਮਹਾਰਾਜਾ ਦੇ ਪ੍ਰੇਮੀ ਗੁਰਸਿੱਖ ਅਤੇ ਇਮਾਨਦਾਰ ਅਫਸਰ ਸਨ ਪਟਿਆਲੇ ਦੇ ਗੁਰਦੁਆਰਾ ਦੁਖਨਵਾਰਨ ਸਾਹਿਬ ਬਣਾਉਣ ਵਾਲੇ ਮੋਢੀਆਂ ਵਿੱਚੋਂ ਸਨ ਇਹਨਾਂ ਦੇ ਹੋਰ ਸਹਿਯੋਗੀ ਸਰਦਾਰ ਆਤਮਾ ਸਿੰਘ ਇੰਜੀਨੀਅਰ ਨੇ ਇਸ ਦਾ ਡਿਜ਼ਾਈਨ ਬਣਾਇਆ ਸੀ ਤੇ ਕੰਮ ਦੀ ਦੇਖਰੇਖ ਕਰਦੇ ਰਹੇ ਇਸ ਵਰਗੀ ਸਰਦਾਰ ਰਣਜੀਤ ਸਿੰਘ ਸਰਕਾਰੀਆ ਰਿਟਾਇਰਡ ਜਸਟਿਸ ਸੁਪਰੀਮ ਕੋਰਟ ਦੇ ਪਿਤਾ ਸਨ ਇਸ ਤੋਂ ਇਲਾਵਾ ਭਾਈ ਅਰਜਨ ਸਿੰਘ ਪੰਜੋਖਰਾ ਭਾਈ ਰਣਜੀਤ ਸਿੰਘ ਜੀ ਦੇ ਜਿसे ਦੇ ਮੈਂਬਰ ਦੀ ਦੇਖਰੇਖੇਤ ਸੇਵਾ ਹੋਈ ਅਤੇ ਸਰਦਾਰ ਹਰਚੰਦ ਸਿੰਘ ਜੇਜੀ ਕੈਪਟਨ ਅਮਰਿੰਦਰ ਸਿੰਘ ਦੇ ਨਾਨਾ ਜੀ ਮਾਇਕ ਸੇਵਾ ਤੋਂ ਇਲਾਵਾ ਹੋਰ ਵੀ ਪਰਾਲਾ ਕਰਦੇ ਰਹੇ ਕੁਝ ਲੋਕਾਂ ਨੇ ਇਹ ਅਫਵਾਹ ਫੈਲਾ ਦਿੱਤੀ ਕਿ ਇਹ ਬੜੀ ਸਖਤ ਜਗਾ ਹੈ ਇਸ ਲਈ ਇਸ ਦਾ ਕੰਮ ਸ਼ੁਰੂ ਕਰਨ ਵਾਲਾ ਔਖਾ ਹੋਵੇਗਾ ਇਸ ਲਈ ਇਸ ਦੇ ਆਰੰਭਕ ਟੱਕ ਲਾਉਣ ਨੂੰ ਕੋਈ ਤਿਆਰ ਨਾ ਹੋਇਆ ਇਸ ਤੇ ਸਰਦਾਰ ਬਚਿੱਤਰ ਸਿੰਘ ਜੀ ਨੇ ਇਹ ਕਹਿ ਕੇ ਇਹ ਕਿ ਕਿ ਕੇ ਜੇ ਇਹ ਸ੍ਰੀ ਗੁਰੂ ਲਿਖੇ ਲੱਗ ਜਾਵੇ ਤਾਂ ਇਸ ਤੋਂ ਚੰਗੀ ਗੱਲ ਕੀ ਹੋਗੀ ਸਭ ਤੋਂ ਪਹਿਲਾਂ ਟੱਕ ਲਾਇਆ ਇਹ ਆਪ ਵੀ ਕਰਸ਼ੋ ਵਿੱਚ ਟੋਕਰੀ ਢੋਂਦੇ ਰਹੇ ਅਤੇ ਇਹਨਾਂ ਦਾ ਜਵਾਨ ਲੜਕਾ ਵੀ ਸੇਵਾ ਕਰਦਾ ਰਿਹਾ ਬਾਣਾ ਕਰਤਾਰ ਦਾ ਮਿੱਟੀ ਪੁੱਟਦੇ ਪੁੱਟਦੇ ਥਾਂ ਉੱਥੇ ਹੀ ਉਸ ਸਸਕਾਰ ਕਰ ਦਿੱਤਾ ਗਿਆ ਕਾਫੀ ਧੀਰ ਉੱਥੇ ਛੋਟਾ ਨਿਸ਼ਾਨ ਸਾਹਿਬ ਲੱਗਿਆ ਅਸੀਂ ਖੁਦ ਦੇਖਿਆ ਪਰ ਜਦ ਸरोवर ਵੱਡਾ ਕੀਤਾ ਗਿਆ ਤੇ ਇਹ ਜਗਾ ਸरोवर ਵਿਚ ਆ ਗਈ ਅਖੀਰ ਵੇਲੇ ਸਰਦਾਰ ਬਚਿੱਤਰ ਸਿੰਘ ਜੀ ਪਟਿਆਰ रियासत ਦੇ ਬਰਨਾਲਾ ਸ਼ਹਿਰ ਵਿੱਚ ਸਰਕਾਰੀ ਰੋਟੀ ਕਰ ਰਹੇ ਸਨ ਇੱਥੇ ਹੀ ਸਰਦਾਰ ਦਲੀਪ ਸਿੰਘ ਚੀਨਾ ਸੁਪਰਡੈਂਟ ਪੁਲਿਸ ਅਤੇ ਹੋਰ ਅਫਸਰਾਂ ਨਾਲ ਅਤੇ ਸਾਡੇ ਬਾਪੂ ਜੀ ਐਕਸਾਈਜ਼ ਇਨਸਪੈਕਟਰ ਲੱਗੇ ਹੋਏ ਸੀ ਤਕਰੀਬਨ 1 ਮਹੀਨਾ ਪਹਿਲਾਂ ਸਰਦਾਰ ਬਚਿੱਤਰ ਸਿੰਘ ਜੀ ਨੇ ਆਪਣੇ ਅੰਤ ਸਮੇ ਦਾ ਪਤਾ ਚੱਲ ਗਿਆ ਪਹਿਲਾਂ ਇਹ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਮਿਲ ਕੇ ਆਏ ਪਰ ਕਿਸੇ ਨੂੰ ਭੇਤ ਨਹੀਂ ਦਿੱਤਾ ਹਫ਼ਤਾ ਕੋ ਪਹਿਲਾਂ ਸ਼ਹਿਰ ਦੇ ਸਾਰੇ ਛੱਜਣ ਮਿੱਤਰਾਂ ਨੂੰ ਮਿਲ ਕੇ ਆਏ ਜਦ ਸਰਦਾਰ ਅਲੀਫ ਸਿੰਘ ਸ਼ੀਨਾ ਜੀ ਨੂੰ ਮਿਲਣ ਗਏ ਇਤਿਹਾਸਕੇ ਕਹਿਣ ਲੱਗੇ ਸਾਡੀ ਬਰਾਤ ਵਿੱਚ ਚੱਲੋਗੇ ਸ਼ੀਨਾ ਸਰ ਪਹਿਲਾਂ ਤਾਂ ਗੱਲ ਸੁਣ ਕੇ ਹੈਰਾਨ ਹੋਏ ਫਿਰ ਸੰਭਲ ਕੇ ਕਹਿਣ ਲੱਗੇ ਜੇ ਸੱਦਾ ਪੱਤਰ ਭੇਜੋਗੇ ਤਾਂ ਆ ਜਾਵਾਂਗੇ ਬਿਨ ਬਲਾਏ ਮਹਿਮਾਨ ਅਸੀਂ ਨਹੀਂ ਬਣਨਾ ਸਮੇ ਤੋਂ 2 ਦਿਨ ਪਹਿਲਾਂ ਘਰ ਦੇ ਜੀਆ ਨੂੰ ਕਹਿ ਕੇ ਕਹਿ ਦਿੱਤਾ ਕਿ ਕੋਈ ਸ਼ਹਿਰੋਂ ਬਾਹਰ ਨਾ ਜਾਏ 1 ਦਿਨ ਪਹਿਲਾਂ ਘਰ ਵਾਲੀ ਨੂੰ ਕਿਹਾ ਸਾਡੇ ਵਾਸਤੇ ਕੋਰਾ ਬਿਸਤਰ ਕੱਢ ਦੇਵੋ ਅਖੀਰਲੇ ਦਿਨ ਸਵੇਰੇ ਅਮਰਤ ਵੇਲੇ ਉੱਠੇ ਸੇਵਾਦਾਰ ਨੇ ਜਿਸ ਨੂੰ ਉਹ ਆਪ ਵੀ ਸਿਆਣੀ ਅਮਰੋ ਕਰਨ ਬਾਬਾ ਜੀ ਕਿਹਾ ਕਰਦੇ ਸੀ ਨੇ ਪਹਿਲਾਂ ਸਰਦਾਰ ਸਾਹਿਬ ਨੂੰ ਸ਼ਨਾਣ ਕਰਾਇਆ ਫਿਰ ਆਪ ਕੀਤਾ ਅੱਗੇ ਆਪ ਪਾਠ ਕਰਿਆ ਕਰਦੇ ਸਨ ਪਰ ਅੱਜ ਕਹਿਣ ਲੱਗੇ ਬਾਬਾ ਜੀ ਅੱਜ ਤੁਸੀਂ ਪਾਠ ਕਰੋ ਮੈਂ ਸੁਣਾਂਗਾ ਨਿਤਨੇਮ ਦੀ ਬਾਣੀ ਦੇ ਪਾਠ ਪਿੱਛੋਂ ਸੁਖਨੀ ਸਾਦਾ ਪਾਠ ਹੋਇਆ ਪਾਠ ਦੀ ਅਰਦਾਸ ਹੋਈ ਅਰਦਾਸ ਪਿੱਛੋਂ ਮੱਥਾ ਟੇਕਿਆ ਸੇਵਾਦਾਰ ਤਾਂ ਉੱਠ ਕੇ ਖੜਾ ਹੋ ਗਿਆ ਪਰ ਸਰਦਾਰ ਸਾਹਿਬ ਦਾ ਮੱਥਾ ਧਰਤੀ ਤੇ ਹੀ ਟਿਕਿਆ ਰਿਹਾ ਜਦ ਸੇਵਾਦਾਰ ਨੇ ਠਾਉਣਾ ਚਾਹਿਆ ਤਾਂ ਪਾਰੋਡਾਰੀ ਮਾਰ ਚੁੱਕਿਆ ਸੀ ਜਦ ਅਰਥੀ ਸਾਰੇ ਅਰਥੀ ਨਾਲ ਸਾਰੇ ਜਾ ਰਹੇ ਸੀ ਅਤੇ ਸਰਦਾਰ ਦਲੀਪ ਸਿੰਘ ਚੀਨਾ ਵੀ ਜਾ ਰਹੇ ਸੀ ਤਾਂ ਪਤਾ ਲੱਗਿਆ ਕਿ ਗਰੇਵਾਲ ਸਾਹਿਬ ਕਿਹੜੀ ਬਰਾਤ ਨਾਲ ਜਾਣ ਲਈ ਕਹਿ ਰਹੇ ਸੀ ਸਾਡੇ ਪਰਦਾਦਾ ਜੀ ਦਾ ਅੰਤਮ ਸਮੇਂ ਦਾ ਦ੍ਰਿਸ਼ ਸਾਡੇ ਬਾਪੂ ਜੀ ਨੇ सामने ਹੋਇਆ ਉਦੋਂ ਉਹ ਤਕਰੀਬਨ 10-11 ਸਾਲ ਦੇ ਸੀ ਪਰਦਾਦਾ ਜੀ ਅਤੇ ਬਾਬਾ ਖੜਕ ਸਿੰਘ ਜੀ ਜੰਬੋ ਮਾਜਰਾ ਪਿੰਡ ਦੇ ਜ਼ਕੀਰਦਾ ਸਰਦਾਰ ਸਨ ਜੋ ਕਿ 1947 ਤੋਂ ਪਹਿਲਾਂ ਲੁਧਿਆਣਾ ਜ਼ਿਲ੍ਹੇ ਵਿੱਚ ਹੀ ਸਨ ਅੱਜ ਕੱਲ੍ਹ ਜ਼ਿਲ੍ਹਾ ਸੰਗਰੂਰ ਵਿੱਚ ਹੈ ਬਾਬਾ ਖੜਕ ਸਿੰਘ ਜੀ ਨੰਗ ਸਿੰਘ ਬੁੱਢੇਦਲ ਦੇ ਜੱਸੀਦਾਰ ਸੀ ਅਤੇ ਨਾਭੇ ਰਿਆਸਤ ਦੀ ਦੀਵਾਨ ਦੀ ਲੜਕੀ ਇਹਨਾਂ ਨੂੰ ਵਿਆਹੀ ਹੋਈ ਸੀ। ਇਹ ਕਾਫੀ ਦੇਰ ਸਤੰਤਰ ਜਥੇ ਨਾਲ ਵਿਚਰਦੇ ਰਹੇ। ਫਿਰ ਕਾਫੀ ਸਾਲ ਫਰੀਦਕੋਟ ਦੇ ਮਹਾਰਾਜਾ ਵਿਕਰਮਾ ਸਿੰਘ ਕੋਲ ਭੀ ਰਹੇ। ਕਈ ਮਹਿਕਮੇ ਇਹਨਾਂ ਨੂੰ ਸੌਂਪੇ ਗਏ ਪਰ ਕੰਮ ਸਾਰਾ ਸੈਕਟਰੀ ਕਰਦੇ ਸਨ। ਸਿਰਫ ਇਹਨਾਂ ਨੂੰ ਆਪਣੇ ਕੋਲ ਰੱਖਣ ਲਈ ਇੱਕ ਬਹਾਨਾ ਬਣਾਇਆ ਸੀ। ਬਾਬਾ ਜੀ ਦੀ ਪ੍ਰੇਰਣਾ ਸਦਕਾ ਹੀ ਮਹਾਰਾਜਾ ਸਾਹਿਬ ਨੇ ਗਿਆਨੀਆਂ ਦੇ ਜਿੱਥੇ ਪਾਸੋਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਟਿੱਕ ਤਿਆਰ ਕਰਾਇਆ ਜਿਸ ਨੂੰ ਫਰੀਦਕੋਟਿਆ ਸਟਿੱਕ ਕਿਹਾ ਜਾਂਦਾ ਹੈ ਅਖੀਰਵਲੇ ਬਾਬਾ ਜੀ ਮੋਗੇ ਕੋਲ ਪਿੰਡ ਕਿਲੀ ਗੰਧਰਾ ਜੋ ਕੋਟੀ ਸਿਖਾਂ ਕੋਲ ਮੋਗਾ ਫਿਰੋਜ਼ਪੁਰ ਸੜਕ ਤੇ ਹੈ ਆਪਣੀ ਲੜਕੀ ਕੋਲ ਚਲੇ ਗਏ ਇੱਥੇ ਇਹ ਪੀਚਸ ਨਾਲ ਬਿਮਾਰ ਹੋ ਗਏ ਇਲਾਜ ਕਰਾਇਆ ਪਰ ਕੁਝ ਖਾਸ ਫਰਕ ਨਾ ਪਿਆ ਇੱਕ ਦਿਨ ਮੇਰੇ ਬਾਬਾ ਜੀ ਸਰਦਾਰ ਕਿਰਪਾਲ ਸਿੰਘ ਆਪਣੀ ਭੈਣ ਨੂੰ ਕਹਿਣ ਲੱਗੇ ਕਈ ਦਿਨ ਹੋ ਗਏ ਬਾਪੂ ਜੀ ਨੇ ਇਸ਼ਨਾਨ ਨਹੀਂ ਕੀਤਾ ਅੱਜ ਨਹਲਾ ਦਈਏ ਬਾਬਾ ਖੜਕ ਸਿੰਘ ਜੀ ਨੇ ਸੁਣ ਲਿਆ ਤੇ ਕਹਿਣ ਲੱਗੇ ਅੱਜ ਨਹਲਾ ਦੇਵੋਗੇ ਅੱਜ ਹੀ ਸਰੀਰ ਛੱਡ ਜਾਵਾਂਗਾ ਨਹੀਂ ਅਜੇ 3 ਦਿਨ ਹੋਰ ਬਾਕੀ ਹਨ ਫਿਰ ਜੋ ਗੁਰੂ ਦਾ ਹੁਕਮ ਹੋਵੇਗਾ ਉਸ ਤਰ੍ਹਾਂ ਹੋਵੇਗਾ ਕਰਦੇ ਜੀ ਕਰਦੇ ਕਿਸੇ ਜੀ ਨੂੰ ਇਸ ਦਾ ਭਰੋਸਾ ਨਾ ਹੋਇਆ ਤੇ ਆਪਸ ਵਿੱਚ ਕਹਿਣ ਲੱਗੇ ਇੱਕ ਤਾਂ ਉਮਰ ਸਿਆਣੀ ਹੈ ਦੂਸਰੇ ਦਸਤਾਂ ਕਰਕੇ ਕਮਜ਼ੋਰੀ ਹੈ ਇਸ ਲਈ ਬਾਵਲਿਆਂ ਵਾਰੀ ਗੱਲਾਂ ਕਰਦੇ ਹਨ ਪਾਣੀ ਗਰਮ ਕਰ ਦਿੱਤਾ ਇਹਦੇ ਵਿੱਚ ਚੌਂਕੀ ਰੱਖ ਕੇ ਪੂਰੀ ਤਿਆਰੀ ਕਰਨ ਪਿੱਛੋਂ ਬਾਬਾ ਜੀ ਕੋਲ ਆ ਗਏ ਤੇ ਚੱਲਣ ਲਈ ਆਖਿਆ ਸੁਣ ਕੇ ਬਾਬਾ ਜੀ ਨੇ ਕਿਹਾ ਮੇਰੀ ਗੱਲ ਗੌਰ ਨਾਲ ਸੁਣੋ ਜ਼ਮੀਨ ਤੁਹਾਡਾ ਜਗੀਰ ਆਪੇ ਸਰਕਾਰ ਤੁਹਾਨੂੰ ਦੇ ਦੇਵੇਗੀ ਪਰ ਮੇਰੇ ਸ਼ਸਤਰ ਵਸਤਰ ਤੇ ਧਾਰਮਿਕ ਪੋਥੀਆਂ ਚਾਹ ਤੁਹਾਡੇ ਚ ਕੋਈ ਵੀ ਹੱਕਦਾਰ ਨਹੀਂ ਇਸ ਲਈ ਸਭ ਨਿਆਂਗ ਸਿੰਘਾਂ ਨੂੰ ਦੇ ਦੇਣਾ ਮੇਰੇ ਮਰਨ ਤੇ ਮੈਨੂੰ ਪੂੰਜੇ ਨਹੀਂ ਪਾਉਣਾ ਕਿਸੇ ਨੇ ਰੋਣਾ ਨਹੀਂ ਮੇਰੇ ਫੁੱਲ ਕੀਰਤਪੁਰ ਸਾਹਿਬ ਨਹੀਂ ਪਾਉਣੇ ਤੇ ਨਾ ਹੀ ਹਰਦੁਆਰ ਫੁੱਲਾਂ ਨੂੰ ਕਰ ਲਿਆ ਕਿ ਚੱਕੀ ਨਾਲ ਪੀ ਲਵੋ ਤੇ दरबार साहिब जो पहली शबद चौकी निकल दिया संगतों दे चरणां विच बिखेर देना सारीया दरतन देख के तुर पे अते जा के चौकी दे बैठ गए एक पासे बाबा जी लेखक दे बाबा खड़े सन दूसरे पासे उनदी पैण सामने बापू जी खड़े सन बापू जी वाले देख के कहण लगी बच्चा तेरे दे ते वाले दी खुशियां वा, बाबा जी ने गड़वाई पानी दी पाई ਜਿਉਂ ही पाणी ਸਰਵਿਚ ਲੱਗਿਆ ਇੱਕ ਆਵਾਜ਼ ਸਰਵਿਚੋਂ ਆਈ ਅਤੇ ਬਾਬਾ ਖੜਕ ਸਿੰਘ ਜੀ ਸਰੀਰ ਛੱਡ ਗਏ ਇਹ ਸਭ ਪਾਣਾ ਬਾਪੂ ਜੀ ਦੇ ਸਾਹਮਣੇ ਵਰਤਿਆ ਜੋ ਉਸ ਸਮੇਂ 6ਵੀਂ ਕਲਾਸ ਵਿੱਚ ਜੀਰੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਸਨ ਸਵਰਗੀ ਸਰਦਾ ਦਲੀਪ ਸਿੰਘ ਚੀਨਾ ਸਾਬਕਾ ਇੰਸਪੈਕਟਰ ਜਨਰਲ ਪੁਲਿਸ ਪੈਪਸੂ ਬਹੁਤ ਇਮਾਨਦਾਰ ਇਨਸਾਫ ਪਸੰਦ ਸੱਚੇ ਸੁੱਚੇ ਨਾਮ ਵਿਅਸੀ ਸਿੰਘ ਕਾਲਜ ਲਾਹੌਰ ਮਹਾਰਾਜਾ ਪਵਿੰਦਰ ਸਿੰਘ ਜੀ ਨਾਲ ਹੀ ਪੜ੍ਹੇ ਸਨ ਪੜਾਈ ਖਤਮ ਹੋਣ ਪਿੱਛੋਂ ਮਹਾਰਾਜਾ ਸਾਹਿਬ ਨੇ ਇਹਨਾਂ ਨੂੰ ਆਪਣੇ ਕੋਲ ਪਟਿਆਲਾ ਬੁਲਾ ਕੇ ਨੌਕਰੀ ਵਿੱਚ ਰੱਖ ਲਿਆ ਪਹਿਲਾਂ ਮਹਾਰਾਜਾ ਸਾਹਿਬ ਨੇ ਏ ਡੀ ਸੀ ਰਹੇ ਫਿਰ ਸੁਪਰਡਿਨੈਂਟ ਬਣ ਕੇ ਦੇਸ਼ ਦੀ ਆਜ਼ਾਦੀ ਪਿੱਛੋਂ ਪੈਪਸੂ ਰਾਜ ਵਿੱਚ ਆਈ ਜੀ ਪੀ ਰਿਟਾਇਰ ਹੋ ਕੇ 92 ਸਾਲ ਦੀ ਉਮਰ ਪੂਰ ਕੇ ਪਰਲੋਕ ਸਦਾਰੇ ਇੱਕ ਦਿਨ ਲੇਖਕ ਬਾਈ ਨੰਬਰ ਫਾਟਕ ਤੇ ਇਹਨਾਂ ਦੀ ਕੋਠੀ ਮਿਲਣ ਗਿਆ ਹੋਰ ਗੱਲਾਂ ਤੋਂ ਇਲਾਵਾ ਇਨਾਂ ਨੇ ਆਪਣੀ ਹੱਡ ਬੀਤੀ ਘਟਨਾ ਇਸ ਤਰ੍ਹਾਂ ਦੱਸੀ ਮੈਂ ਇੱਕ ਦਿਨ ਮੰਜੇ ਦੇ ਪਿਆ ਵਾਹਿਗੁਰੂ ਵਾਹਿਗੁਰੂ ਦਾ ਮੰਤਰ ਦਾ ਜਾਪ ਕਰ ਰਿਹਾ ਸੀ ਅਚਾਨਕ ਮਨ ਵਿੱਚ ਫੁਰਨਾ ਆਇਆ ਕਿ ਗੁਰਬਾਣੀ ਦੱਸ ਰਹੀ ਹੈ ਕਿ ਕਾਲ ਸਦਾ ਤੇਰੇ ਸਿਰ ਤੇ ਖੜਾ ਹੈ ਪਰ ਕਦੇ ਦੇਖਿਆ ਨਹੀਂ ਐ ਜੀ ਕਾਲ ਸਦਾ ਸਿਰ ਉੱਪਰ ਛਾਡੇ ਜਨਮ ਜਨਮ ਵੈਰਾਈ ਅਗਲੇ ਸ਼ਬਦ ਵਿੱਚ ਫਰਮਾਉਂਦੇ ਹਨ ਜਤ ਜਾਤ ਜਾਤ ਜਾਤ ਸਦਾ ਸਦਾ ਸਦਾ ਸਦਾ ਕਾਲ ਹੈਈ मान मान मान त्याग मृत मृत मृत निकट निकट सधई फुरण औण दी दे देरी सी कि सिर दे निकली सिरदा आकार हाथ दे अंगूठे जिन्ना सी होली होली आकार वद के बड़ी डरावनी सूरत वाला मनुखी कार बन के मेरी छाती ते बैठ गया ਅਤੇ ਇੰਗੂਠਾ ਮੇਰੀ ਸ਼ਾਹ ਰਗ ਤੇ ਰੱਖ ਕੇ ਗਾਲਾ ਕੁੱਟਣ ਲੱਗ ਪਿਆ ਇੱਕ ਪਲ ਦੀ ਖਬਰਾੜ ਪਿੱਛੋਂ ਮੈਂ ਸਾਵਧਾਨ ਹੋ ਕੇ ਉੱਚੀ ਉੱਚੀ ਵਾਇਗੁਰੂ ਮੰਤਰ ਦਾ ਜਾਪ ਕਰਨ ਲੱਗ ਪਿਆ ਜਿਉਂ ਹੀ ਵਾਇਗੁਰੂ ਮੰਤਰ ਦਾ ਜਾਪ ਸ਼ੁਰੂ ਹੋਇਆ ਪਗੜ ਢਿੱਲੀ ਹੁੰਦੀ ਗਈ ਅਤੇ ਅੰਤ ਨੂੰ ਉਹ ਆਪਣੇ ਪਹਿਲਾਂ ਵਾਲੇ ਛੋਟੇਕਾਰ ਰਹੀ ਫਿਰ ਵਿੱਚ ਸਮਾ ਗਿਆ ਸਿਰ ਮੈਨੂੰ ਯਕੀਨ ਹੋ ਗਿਆ ਕਿ ਬਾਣੀ ਦਾ ਇੱਕ ਅੱਖਰ ਸੱਚ ਹੈ ਕਿਹੜੇ ਵਿਗਿਆਨੀ ਦਾ ਕਿਹੜੇ ਵਿਗਿਆਨ ਦਾ ਵਿਗਿਆਨੀ ਇਹ ਘਟਨਾ ਨੂੰ ਸਹੀ ਮੰਨੇਗਾ ਜਰ ਜਿਸਤੇ ਹੱਡੀ ਵਾਪਰੀ ਉਸਦੇ ਵਿਸ਼ਵਾਸ ਨੂੰ ਕੋਈ ਤਰਕ ਜਾਂ ਵਿਗਿਆਨੀ ਤੋੜ ਨਹੀਂ ਸਕਦਾ ਪਿਛਲੀ सदी ਦੇ ਅਸੀਂ ਵਿੱਚ ਮੇਰੇ ਵੱਡੇ ਭਾਈ ਸਾਹਿਬ ਜ਼ਗਾਦਰੀ ਮਰਬਾਬੰਦੀ ਦੇ ਕੰਗੋ ਲੱਗੇ ਹੋਏ ਸਨ ਇੱਕ ਦਿਨ ਉਹਨਾਂ ਦੇ ਮਹਿਕਮੇ ਦੇ ਪਟਵਾਰੀ ਜਗਨਨਾਥ ਨੇ ਦਰਖਾਸਤ ਦਿੱਤੀ ਕਿ ਮੇਰੀ ਮਾਂ ਫਲਾਣੀ ਤਰੀਕ ਨੂੰ ਮਰਨਾ ਹੈ ਤੇ ਮੈਨੂੰ ਛੁੱਟੀ ਚਾਹੀਦੀ ਹੈ ਦਰਖਾਸਤ ਭਾਈ ਸਾਹਿਬ ਨੇ ਪੜ੍ਹੀ ਤੇ ਪਟਵਾਰੀ ਨੇ ਕਿਹਾ ਛੁੱਟੀ ਲੈਣ ਲਈ ਹੋਰ ਬਥੇਰੇ ਬਹਾਨੇ ਹਨ ਤੂੰ ਛੁੱਟੀ ਲਈ ਮਾਂ ਨੂੰ ਹੀ ਮਾਰ ਰਿਆਂ ਹੈ ਜਗਨਨਾਥ ਕਹਿਣ ਲੱਗਾ ਮੈਂ ਸੱਚ ਕਹਿੰਦਾ ਹਾਂ ਮੇਰੀ ਮਾਂ ਨੇ ਜ਼ਿੰਦਗੀ ਵਿੱਚ ਕਦੇ ਝੂਠ ਨਹੀਂ ਬੋਲਿਆ ਅਤੇ ਜਦੋਂ ਮੈਂ ਪਿਛਲੀ ਵਾਰੀ ਮਿਲਣ ਗਿਆ ਸੀ ਤਾਂ ਮੈਨੂੰ ਉਸਨੇ ਕਿਹਾ ਕਿ ਮੈਂ ਜਿਸ ਦਿਨ ਮਰਨਾ ਹੈ ਜਲਦੀ ਆ ਜਾਈਂ ਭਾਈ ਸਾਹਿਬ ਨੇ ਦਰਖਾਸਤ ਨਵੇਂ ਤਹਿਸੀਲਦਾਰ ਕੋਲ ਕਰ ਦਿੱਤੀ ਉਸਨੇ ਵੀ ਜਗਨਨਾਥ ਨੂੰ ਭਾਈ ਸਾਹਬ ਵਾਲਾ ਪ੍ਰਸ਼ਨ ਕੀਤਾ ਤੇ ਉਸਨੇ ਵੀ ਉਹੀ ਜਵਾਬ ਦੇ ਦਿੱਤਾ ਤਹਿਸੀਲਦਾਰ ਸਾਹਿਬ ਨੇ ਛੁੱਟੀ ਮਨਜ਼ੂਰ ਕਰ ਦਿੱਤੀ ਤੇ ਨਾਲ ਹੀ ਇੱਕ ਚਪੜਾਸੀ ਪਰਤਾਲ ਲਈ ਜਗਨਨਾਥ ਪਟਵਾਰੀ ਦੇ ਪਿੰਡ ਕੱਲ ਦਿੱਤਾ ਚਪੜਾਸੀ ਨੇ ਵਾਪਸ ਆ ਕੇ ਜੋ ਤਸੀਹਦ ਹਦ ਸਭ ਨੂੰ ਦੱਸਿਆ ਉਹ ਇਸ ਤਰ੍ਹਾਂ ਸੀ ਅਸੀਂ ਅੰਮ੍ਰਿਤਸਰ ਸ਼ਹਿਰ ਕੋਲ ਜਗਨਨਾਥ ਦੇ ਪਿੰਡ ਬੈਠੀ ਸੀ ਅਤੇ ਉਸ ਬੁਲਾਏ ਹੋਏ ਸਨ ਜਗਨਨਾਥ ਨੂੰ ਦੇਖ ਕੇ ਮਾਂ ਕਹਿਣ ਲੱਗੀ ਪੁੱਤ ਤੂੰ ਦੇਰ ਕਿਉਂ ਕਰ ਦਿੱਤੀ ਤੈਨੂੰ ਕਾਫੀ ਦੇਰ ਤੋਂ ਢੀਕ ਰਹੀ ਰਹੀ ਹਾਂ ਇਹਨਾਂ ਕਹਿ ਕੇ ਉਸ ਜਗਨਨਾਥ ਨਾਲ ਕੁਝ ਗੁਪਤ ਗੱਲਾਂ ਕੀਤੀਆਂ ਫਿਰ ਜਿਸ ਤੋਂ ਜੋ ਕੁਝ ਲੈਣਾ ਦੇਣਾ ਸੀ ਉਸ ਦੱਸਿਆ ਸਾਰੀਆਂ ਗੱਲਾਂ ਕਰਕੇ ਉਸਨੇ ਉਸਦੀ ਮਾਂ ਨੇ ਸਾਰੇ ਪਰਿਵਾਰ ਦੇ ਜੀਵਾਂ ਨੂੰ ਪਿਆਰ ਦਿੱਤਾ ਫਿਰ ਉੱਠ ਕੇ ਇਸ਼ਨਾਨ ਕੀਤਾ ਪਹਿਲਾਂ ਤਿਆਰ ਕੀਤਾ ਹੋਇਆ ਅਖੀਰ ਤੇ ਪਹਿਨਣ ਵਾਲਾ ਸੂਟ ਪਹਿਨੇ ਤੇ ਸਭ ਨੂੰ ਕਿਹਾ ਕਿ ਤੁਸੀਂ ਮੈਨੂੰ ਆਰਾਮ ਕਰਨ ਦਿਓ ਇਹਨਾਂ ਕਹਿ ਕੇ ਉਹ ਮੰੰਜੇ ਤੇ ਚਾਦਰ ਲੈ ਕੇ ਪੈ ਗਈ ਥੋੜੀ ਜਿਹਾ ਪਿੱਛੋਂ ਜਦ ਜਗਨਨਾਥ ਨੇ ਆ ਕੇ ਦੇਖਿਆ ਤਾਂ ਮਾਂ ਪ੍ਰਲੋਕ ਪਿਆਨਾ ਕਰ ਗਈ ਸੀ ਕੀ ਵਿਗਿਆਨ ਇਹਨਾਂ ਗੱਲਾਂ ਨੂੰ ਮੰਨਣ ਨੂੰ ਤਿਆਰ ਹੈ ਕਿ ਕਿਸੇ ਵਿਗਿਆਨੀ ਨੇ ਇਸ ਤਰ੍ਹਾਂ ਅਜੇ ਤੱਕ ਕੀਤਾ ਹੈ ਜਾਂ ਕੋਈ ਹੋਰ ਕਰਕੇ ਜਾਂ ਕੋਈ ਹੁਣ ਕਰਕੇ ਵਿਖਾ ਸਕਦਾ ਹੈ ਅੱਜ ਤੱਕ ਦੇ ਅੱਜ ਅੱਜ ਕੱਲ ਦੇ ਅੱਜ ਤੱਕ ਦੇ ਵਿਗਿਆਨਕ ਇਤਿਹਾਸ ਵਿੱਚ ਕੇਵਲ ਇੱਕ ਵਿਗਿਆਨੀ ਨੇ ਪੋਟਾਸ਼ੀਅਮ ਸ਼ਾਈਨਿਡ ਦਾ ਸਵਾਦ ਦੇਖਣ ਲਈ ਆਪਣਾ ਪੇਟ ਕੀਤਾ ਸੀ ਜੋ ਕਿ ਖਾਂਦੇ ਸਾਰ ਮਰ ਗਿਆ ਪਰ ਸਵਾਦ ਦੱਸ ਨਹੀਂ ਸਕਿਆ ਯੁਗੋਸਲਾਵੀਏ ਦੇ ਸਾਬਕਾ ਰਾਸ਼ਟਰਪਤੀ ਮਾਰਸ਼ਲ ਟਿਟੋ 6 ਮਹੀਨੇ ਮਰਨ ਕਿਨਾਰੇ ਪਿਆ ਰਹਾ ਕੋਈ ਵਿਗਿਆਨੀ ਜਾਂ ਡਾਕਟਰ ਨਹੀਂ ਦੱਸ ਸਕਿਆ ਕਿ ਕਦ ਮਰੇਗਾ ਰੂਸ ਦੇ ਸਾਰੇ ਡਾਕਟਰ ਸਟਾਲਿਨ ਨੂੰ ਮਰਨ ਤੋਂ ਬਚਾ ਨਹੀਂ ਸਕੇ ਜਿਹੜੇ ਕਹਿੰਦੇ ਸਨ ਕਿ 100 ਸਾਲ ਮਰਨ ਨਹੀਂ ਦੇਵਾਂਗੇ ਅਜਿਹਾ ਜੇ ਕਿਸੇ ਨੇ ਕੀਤਾ ਤਾਂ ਕੇਵਲ ਧਾਰਮਿਕ ਪੁਰਸ਼ਾਂ ਨੇ ਕੀਤਾ ਇਸ ਲਈ ਸਿੱਖ ਧਰਮ ਨੂੰ ਵਿਗਿਆਨਕ ਧਰਮ ਕਹਿਣ ਵਾਲੇ ਸੱਚਾਈ ਤੋਂ ਕੋਹਾਂ ਦੂਰ ਅਗਿਆਨਤਾ ਨਾਲ ਗੁਰ ਇਤਿਹਾਸ ਨੂੰ ਵਿਗਿਆਨ ਦੀ ਕਿਸਵੱਟੀ ਤੇ ਪਰਖ ਕੇ ਸਿੱਖ ਇਤਿਹਾਸ ਨਾਲ ਖਿਲਵਾੜ ਕਰ ਰਹੇ ਹਨ ਅਤੇ ਜਨ ਸਧਰਮ ਨੂੰ ਗੁੰਮਰਾਹ ਕਰ ਰਹੇ ਹਨ ਜੰਮਨ ਮਰਨ ਨ ਤਿੰਨ ਕੋ ਜੋ ਹਰ ਲੜ ਲਾਗੇ ਜੀਵਤ ਸੇ ਮਰਵਾ ਹੋਏ ਹਰ ਕੀਰਤਨ ਜਾਗੇ ਅਗਲੇ ਇੱਕ ਹੋਰ ਸ਼ਬਦ ਉਸ ਫਰਮਾਉਂਦੇ ਹਨ ਕਿ ਆ ਜਾਣਾ ਕਿਵ ਮਰਾਂਗੇ ਕਿਹਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ ਮਰਨੇ ਤੇ ਜਗਤ ਡਰੈ ਜੀਵਿਆ ਲੋੜੇ ਸਭ ਕੋਏ ਗੁਰਪ੍ਰਸਾਦੀ ਜੀਵਤ ਮਰੈ ਹੁਕਮੇ ਬੂਝੈ ਸੋਏ ਨਾਨਕ ਐਸੀ ਮਰਨੀ ਜੋ ਮਰੇ ਤਾਂ ਸਦ ਜੀਵਨ ਹੋਏ